ਹਾਂਜੀ ਸ਼ਲੋਕ ਮਹਲਾ ਪੰਜਵਾਂ ਹਰ ਨਾਮ ਨ ਸਿਮਰੈ ਸਾਧ ਸੰਗੀ ਤੈ ਤਨ ਉੱਡੈ ਖੇ ਜਿਨ ਕੀਤੀ ਕਿਸੈ ਨ ਜਾਣਈ ਨਾਨਕ ਫਿੱਟ ਅਲੂਣੀ ਦੇ ਜਿਹੜੀ ਆ ਦੇਹੀ ਹੁੰਦੀ ਆ ਹਾਂਜੀ ਆਪਣੀ ਪਰ ਥਾਡੀ ਹੁੰਦੀ ਅੱਛਾ ਜੀ ਅਲੂੜੀ ਦਲੇ ਦੇ ਲੋੜੀ ਦੇ ਕਿ ਅ ਇਹ ਦੇ ਲੋੜ ਵਾਲੀ ਹੁੰਦੀ ਹੈ ਦੇ ਕਿ ਲੋੜ ਹੁੰਦਾ ਹੈ ਆਪਾਂ ਸਮਝ ਜਾਂਦੇ ਠੀਕ ਰਹਿੰਦਾ ਜਿਆਦਾ ਸਾਧ ਸੰਗੀ ਤੈ ਤਨ ਉੱਡੇ ਖੇ ਉਹ ਖੇ ਉੱਡਣੀ ਉਹਨਾਂ ਤਕਵੀਰ ਕੋਸ਼ੀ ਉੱਡਣ ਤਨ ਦੀ ਦੇਹੀ ਬਾਹਰ ਦੀ ਦੇਹੀ ਬੰਦੀ ਹੋਈ ਹੈ ਅੱਛਾ ਜੀ ਅੱਦਲੀ ਦੇ ਇਹਨਾਂ ਨੂੰ ਕਿਹਾ ਦੇ ਦੀ ਉਹਦੇ ਨੇ ਤਾਂ ਬਾਹਲੇ ਦੇ ਦੀ ਬੰਦੇ ਇਹਦੀ ਤਾਂ ਖੇ ਉਡੜਨੀ ਹੋ ਉਡੜਨੀ ਅੱਛਾ ਜੀ ਜਿਹੜੀ ਦੇਹੀ ਕੀਤੀ ਤੇ ਸੈਨਾ ਜਾਣੀ ਨਾਨਕ ਫਿਰ ਟੱਲੋਣੀ ਦੇ ਜਿਨ ਤੇਰੀ ਦੇਹੀ ਹੈ ਉਹ ਅਸਲ ਦੇਹੀ ਉਹ ਹੈ ਤੇਰੀ ਗੁਪਤ ਅੱਛਾ ਜੀ ਉਹ ਬਨੇ ਹੀ ਦਿੱਸ ਐ ਤੈਨੂੰ ਬਨੇ ਹੀ ਦਿੱਤੀ ਸੀ ਸੱਤਲੂ ਇਤਲ ਤਾਂ ਕਹੀ ਬੋਲੀ ਆਪਣੇ ਹੀ ਪੁੱਲ ਗਿਆ ਦਾਤ ਕੀਤੀ ਜਿਹੜੇ ਬਣਾ ਕੇ ਦਿੱਤੀ ਐ ਦੇਖੀ ਉਹਨੂੰ ਤਾਂ ਜੁੜਿਆ ਦੀ ਤੈ ਉਹ ਫਟਾ ਲੂੜੀ ਤੇ ਐ ਲੂੜੀ ਤੇ ਜਿਹੜਾ ਫਟੇ ਰੂਹ ਜਿਹੜਾ ਤੇਰਾ ਫੱਦਨੀ ਦੇ ਜਿਹੜੀ ਤੇਰੀ ਆਪਣੀ ਦੇਹੀ ਲੂੜੀ ਐ ਜਿਹੜਾ ਦਾਤ ਜੋ ਤੇਰੀ ਤੇਰੀ ਜੋਤ ਫਟੇ ਰੂਹ ਉਹਨੇ ਆਪਣੀ ਜੋਤ ਹੈ ਪ੍ਰਗਟ ਕੀਤੀ ਹੈ ਜੋਤ ਜੁੜੀ ਹੈ ਸੰਸਾਰ ਇਸ ਸਰੀਰ ਤੇ ਠੀਕ ਹੈ ਪਰ ਜਿੰਨੀ ਜਨ ਕੀਤੀ ਕਿਨਨ ਕਿਹਾ ਇਹ ਮੂਲ ਨੂੰ ਕਿਹਾ ਉਹ ਗਾ ਉਹ ਉਹ ਗਾ ਪਰਮੇਸ਼ਰ ਗਾਣੇ ਦੇ ਪਛਾਣ ਦੇ ਬੋਲ ਪਰਮੇਸ਼ਰ ਉਸ ਤਰ੍ਹਾਂ ਦੇ ਪਛਾਣ ਲਓ ਇਕੱਠ ਕੇ ਗਾਣ ਤਾਂ ਸਾਡੋਲ ਪਾਇਆ ਜਾਂਦਾ जिन तीते से ना जाना ही नानक फिट अलूनी दे ए क्यों कह जी फिट अलूनी दे ते इनु क्यों फिट अलूनी किया वर्दी भी दे ही, ही, ही है, है जो तो वो जो स्वरूप जुड़ी फसया आधा ही है बया आले पे तो 30 साल हो है ਉਹ ਅੱਧਾ ਜਿਹੜਾ ਖਾ ਲੈ ਗਿਆ ਉਹਨੂੰ ਘਿਆੜੀ ਰੋਟੀ ਜਨਮ ਦਾ ਜਿਹਦੇ ਤੈਨੂੰ ਬੁਲਾ ਕੇ ਆਏ ਦੇ ਵਿੱਚ ਫਿਰ ਸਿੱਟਦਾ ਹੈ ਠੀਕ ਹੈ ਜੀ ਐ ਦਾ ਆਪਣਾ ਗੂਲ ਬਣੀ ਪੰਜਾਬ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਜਿਹਦੇ ਜਨਨ ਦੇ ਨਾਲ ਤੇ ਮਿਲਿਆ ਜਾਂਦੇ ਜੁੜ ਜਾਂਦੇ ਫਿਰ ਸੋ ਜਾਂਦੇ ਜਿਹੜੇ ਪਹਿਲਾਂ ਮੂੜਾ ਤੇ ਹਿਰਦੇ ਵਿਚ ਵਸਦਾ ਉਹਦੇ ਬਾਸ ਤੇ ਸਵੇਰ ਦਾ ਰਾਗ ਬੋਲੇ ਪੂਰੀ ਜਪੇ ਗੋਪਾਲ ਇਸ ਖਰਕੇ ਤੇ ਗੋਪਾਲ ਗੋਪਾਲ ਜੇ ਪਰਲ ਤੇ ਆਈ ਤਾਂ ਕਪਾਲ ਨੂੰ ਜਨਰੇਟ ਹੈ ਜੈ ਆ ਇਸੇ ਤਰੀਕੇ ਨਾਲ ਜਨਨ ਚਾਹੀਦਾ ਜੀ ਤੋਂ ਤੁਹਾਨੂੰ ਰਸ ਵੀ ਆਵੇ। ਖੁੱਗ ਜੇ ਆਪ ਕੋਈ ਧੀਰ ਬੈਰੂ ਵੈਰੂ ਕੋਈ ਜਾਈਏ ਰਸ ਨਾ ਆਵੇ ਕੋਈ ਫਾਇਦਾ ਨਹੀਂ। ਬੋਲੋ ਜੋ ਗੁਰਜੀ ਬੋਲੋ। ਦੋ ਜਣਾ ਬ੍ਰਿਧੀ ਉਤਿਆਨ ਕਰੋ। ਜਾਂ ਜਿਹੜਾ ਬ੍ਰਿਧੀ ਉਤਿਆਨ ਕਰੋ ਅਜਿਹਾ ਜਿਹਾ ਅਸਾਂ ਹੀ ਤਰਬਲ ਲਿਓ। ਵੀ ਰੋਏ ਰੱਖਿਆ ਜੀ ਉਹਦੇ। ਉਧਰ ਰਸ ਹੋਣਾ ਚਾਹੀਦਾ ਰਸ ਗਿਆਨ ਹੋਣਾ ਚਾਹੀਦਾ। ਸਭ ਜੋੜੀ ਚਾਹੀਦੀ ਸਮਝ ਦਾਸ ਸਮਝ ਨਹੀਂ ਆ ਦਾਸ ਵੀ ਕਿ ਠੀਕ ਹੈ ਵੀ ਬੁੱਧੀ ਦੁਆਰਾ ਉਹਨੂੰ ਜਾਣਨਾ ਚਾਹੀਦਾ ਵਾ ਉਹ ਜੇ ਸਮਝ ਵੀ ਆਵੇ ਕੁਝ ਕੋਈ ਕੀ ਕਹਿ ਰਿਹਾ ਕੋਈ ਕੀ ਨੂੰ ਕਹਿ ਰਿਹਾ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਜਿਹੜਾ ਦੇਹੀ ਨੂੰ ਪਾਲਦਾ ਉਹ ਪ੍ਰਭ ਸਿਮਰੇ ਪਾਲਦਾ ਤਾਂ ਉਹ ਹੈ ਪਾਲਦਾ ਤੂ ਵੀ ਪਾਲਦਾ ਪਾਲਦਾ ਉਹ ਕਿਵੇਂ ਮੈਂ ਤਾਂ ਖੜਾ ਹੂਰੇ ਅਪਾਧਾ ਕਹੋ ਜੇ ਵੀ ਅਫਰੀ ਖਾਣ ਨਾਲ ਕੰਮ ਕਰਦੇ ਹੋ ਰੋਟੀ ਅਸੀਂ ਖਾਣ ਨਾਲ ਸਾਡੇ ਉਹ ਬੰਦ ਖਾਂਦਾ ਜਾਨੜੋ ਜਿੱਦਕੇ ਸਾਦੀ ਹੁਦਾਰਦ ਕਰ ਸਕਦਾ ਸਾਹ ਹੋਣ ਦਾ ਹਾਂ ਹਾਂ ਆਟਾ ਮੀਟ ਕੰਮ ਕਰ ਤੂੰ ਕਰਦੇ ਕਿ ਜੇ ਚੱਲਦਾ ਉਹ ਚੱਕੀ ਤੇ ਖੜਾ ਹੈ ਚੱਕੀ ਵੀ ਆਟਾ ਮੋਟਾ ਕਰਦਾ ਉਹ ਚੱਕੀ ਬਤਨਦਰੀ ਜਿਹੜੇ ਲਾਉਂਦਾ ਹੈ ਮੋਟਰ ਚਲਾਉਂਦੀ ਹੈ ਉਹ ਨਹੀਂ ਚੱਲਦਾ ਤੇ ਆ ਇਹ ਇੱਧਰ ਚੱਲੂਗਾ ਕahin ਕੋ ਥੋੜਾ ਜਿਹਾ ਦਿਸਾਂ ਦਾ ਫਰਕ ਪੈ ਜਾਂਦਾ ਠੀਕ ਹੈ ਇੱਥੇ ਪ੍ਰਭ ਤੁੰ ਦੱਸਿਆ ਕਿ ਨਾਨਕ ਇਹ ਦੱਸ ਰਿਹਾ ਕਿ ਪ੍ਰਭ ਦੇਹ ਨੂੰ ਪਾਲਦਾ ਦੇਖੋ ਜੀ ਸਾਹ ਸਾਹ ਲੈਦੀ ਸਭ ਲਵਾਇਆ ਜੇ ਛਾਈ ਨਹੀਂ ਆਊਗਾ ਫਿਰ ਦੇਖੇ ਕਿਵੇਂ ਪੜੂਗੀ ਗਈ ਤਾਂ ਗਈ ਇਹਨਾਂ ਨੂੰ ਪੰਖਾਮ ਪੈਂਦਾ ਅਰਥਾਂ ਦਾ ਅਰਥ ਜੋ ਪਰਮੇਸ਼ਰ ਹੈ ਜਰ ਕਿ ਪ੍ਰਭ ਆਪਣੇ ਮੂਲ ਨੂੰ ਕਿਹਾ ਹੈ ਆ ਪਰਮੇਸ਼ਰ ਦਾ ਬਾਹਰਲਾ ਸ੍ਰਿਸ਼ਟ ਗੁਣਾ ਹੈ ਪਰਮੇਸ਼ਰ ਦਾ ਸਤਗੁਰ ਦਾ ਜਿਹੜਾ ਹੈ ਕਾਬੂ ਉਹ ਪਰਮੇਸ਼ਰ ਆਪ ਅਜੇ ਵੀ ਬੋਲ ਕੇ ਗੁਰਬਾਣੀ ਸਤਗੁਰ ਤੋਂ ਲੋਕਾਂ ਨੂੰ ਦੋਸ਼ੀ ਆ ਵਗੈਰਾ ਲਈ ਤੂੰ ਬੋਲ ਕੇ ਦੱਸ ਮੇਰੇ ਮੇਰੇ ਕੋਲ શરીર ਹੋਵੇ ਉਹ શરીર ਤਾਂ ਹਾਲੇ ਜ਼ਰਾ ਕੋਈ ਗੱਲ ਇਹਦਾ ਹੂੰ ਤਾਂ ਰੂਪ ਵਿੱਚ ਕਰਤਾ ਸਤਗੁਰ ਹੈ ਗੁਪਤ ਰੂਪ ਵਿੱਚ ਕਰਤਾ ਪਰਮੇਸ਼ਰ ਹੈ ਪਰਗਟ ਕਰਤਾ ਅਸਲ ਤੇ ਜੀਵਾਤ ਬਲਦੇ ਇਹ ਜੀਵਾਤ ਬਲ ਪ੍ਰਗਟ ਕਰਦਾ ਉਹ ਕਿਤੇ ਕੀਤੀ ਪ੍ਰਗਟ ਕਰਦਾ ਗੁਰਬਾਣੀ ਵੀ ਬੱਦੀ ਭਗਵਾਨ ਤੇ ਰਾਜਾ ਨੂੰ ਇਹ ਪਰ ਹੁਣੇ ਕੀ ਨੂੰ ਕਿਹਾ ਫਿਰ ਨਾਨਕ ਸਰੂਪ ਪ੍ਰਭ ਸਿਮਰਿਅਤਿਸ ਦੇਹੀ ਕੋ ਪਾਲ ਤੇ ਪ੍ਰਭ ਦਾ ਇਹ ਜਿਹਨੋ ਕਿਹਾ ਪ੍ਰਗਟ ਕਰਦੇ ਠੀਕ ਹੈ ਜੀ ਦੇਖੋ ਤਾਂ ਦੇਰ ਦਾ 파ੜੂ ਦਾ ਪਰਗਟ ਹੋਵੇ 파ੜੂਗਾ ਗੁਪਤ ਆ ਸ਼ਿਭਰੀਆ ਸਾਡੇ ਕੀਆ ਫਾਇਦਾ ਹੋ ਰਹੀਏ ਤੇ ਵੀ ਪੈ ਰਿਆ ਉਹ ਦੇ ਅੰਦਰ ਉਹ ਚੀਜ਼ ਆਕਤੀ ਦੇ ਅੰਦਰ ਸਾਡੀ ਅਫਰੋਜਦ ਪਰੇ ਨੇ ਇਹ ਰੋਜ਼ੀ ਕੋਜ਼ਰ ਸਰ ਇਹ ਰੋਜ਼ੀ ਕੋਜ਼ਰ ਗੁਪਤ ਕਰਦਾ ਠੀਕ ਹੈ ਜੀ ਇਥੇ ਇੱਥੇ ਦਾ ਆਪਣੇ ਮੂਲ ਦੀ ਗੱਲ ਕੀਤੀ ਹੈ ਕਿ ਮੂਲ ਨੂ ਆਪਣੇ ਧਿਆਨ ਵਿੱਚ ਰੱਖ ਕਿਉਂਕਿ ਉਹੀ ਦੇਹੀ ਦੀ ਪਾਲਣਾ ਜੇ ਦਿਨ ਮੂਲ ਚਲੇ ਗਿਆ ਉਦੋਂ ਦੇਹੀ ਫਿਰ ਵਸ ਕਰਕੇ ਹੀ ਦੇਹੀ ਚੱਲ ਹੀ ਧਿਆਨ ਵਿੱਚ ਰੱਖਣਾ ਉਹੀ ਪਾਲ ਰੇ ਹਾਂ ਵੇਲੇ ਦੇਹੀ ਨਹੀਂ ਹੈ ਸਕਦੀ ਉਰ ਬੋਲ ਗਿਆ ਸਾਥ ਪੋਟੇ ਆਬੇ ਸਰ ਕੇ ਜਿਹੜਾ ਦੇਇਜ਼ਤੀ ਠੀਕ ਹੈ ਜੀ ਸਹੀ ਹੋੜੀ ਲੈ ਕੇ ਆਪੇ ਅੱਖਰ ਦੀ ਵਰਤੋਂ ਬੜੀ ਖੁੱਲੇ ਤੌਰ ਤੇ ਹੋਈ ਹੈ ਜੋਤ ਵਾਸਤੇ ਆਪਰੇ ਆ ਸਕਦਾ ਆਪੇ ਅੱਖਰ ਦੇ ਬੜੇ ਮੈਨੇ ਬਣਦੇ ਆ ਜੇ ਆਪਾਂ ਇਹਨੂੰ ਅੰਗਰੇਜ਼ੀ ਦੇ ਤੌਰ ਤੇ ਦੇਖੀਏ ਹਾਂਜੀ ਮਾਈ ਸੈਲਫ ਵਾਸਤੇ ਵੀ ਇਹ ਵਰਤੇ ਜਾਂਦਾ ਯੂਰ ਸੈਲਫ ਵਾਸਤੇ ਵੀ ਹਿਮ ਸੈਲਫ ਵਾਸਤੇ ਵੀ ਦੇਮ ਸੈਲਫਸ ਵਾਸਤੇ ਵੀ ਉਹ ਤਾਂ ਆਪਣਾ ਪ੍ਰਕਰਣ ਦਾ ਪਤਾ ਲੱਗੂ ਵੀ ਆਪੇ ਕਿਹਦੇ ਵਾਸਤੇ ਠੀਕ ਹੈ ਜੀ ਪੂਰੇ ਆਦਿ ਬਾਣੀ ਵਿੱਚ ਇਹ 1655 ਵਾਰ ਆਖਰ ਵਰਤਿਆ ਗਿਆ ਜੀ ਜਪਤੀ ਸਾਹਿਬ ਚ ਵਰਤਿਆ ਨਾਨਕ ਏਵੇਂ ਜਾਣੀਏ ਸਭ ਆਪੇ ਸਚਿਆਰ ਤੇ ਇੱਥੇ ਆਪੇ ਕਿਹਦੇ ਵਾਸਤੇ ਵਰਤਿਆ ਜੀ ਕੀ ਬਾਤ ਹੋਦਾ ਸ ਹਾਂਜੀ ਅਗਲੀ ਵਾਰ ਇਹ ਜੀ ਆਪੇ ਆਪ ਨਿਰੰਜਨ ਸੋਏ ਅੱਛਾ ਜੀ ਇਹ ਜੋਤ ਵਾਸਤੇ ਆ ਰਹੇ ਆ ਜੀ ਉਹ ਆਪਣੇ ਆਪ ਦੀ ਜੋਤਨ ਮਰਜਣੇ ਇੱਕ ਨੂੰ ਬੋਧਨ ਕਰਕੇ ਆਪ ਕੀਤਾ ਅੱਛਾ ਜੀ ਚਾਹੇ ਇੱਕ ਦਾਰ ਦੇ ਰੂਪ ਚਾਹੇ ਇੱਕ ਦੇ ਰੂਪ ਚਾਹੇ ਦਾਰ ਕਿਨੀ ਕਬੀਏ ਕੀ ਹੈ ਕਿڑی ਜੋਰ ਵੀ ਕੋਈ ਹੋਵੇ ਆਪ ਦੀ ਜੋਤ ਦੇ ਰੱਖਦੇ ਹਾਂਜੀ ਆਪੇ ਬੀਜ ਆਪੇ ਹੀ ਖਾਓ ਜੇ ਰੋ ਬੀਜੇਗਾ ਤਾਂ ਖਾਲੇਗਾ ਤੇ ਖੀ ਬੀਜੇ ਸੋਈ ਇੱਥੇ ਹੁਣ ਆਪੇ ਕੀ ਵਾਸਤੇ ਆ ਰਹੇ ਜੀ ਵਾਪਸ ਕਰਤਾ ਅਲਜੀਤ ਜੇਸਤੀ ਸਾਜੀ ਵਾਸਤੇ ਠੀਕ ਹੈ ਜੀ ਜਿਸ ਤਰ੍ਹਾਂ ਦਾ ਪ੍ਰਕਰਨ ਹੈ ਉਸ ਹਿਸਾਬ ਨਾਲ ਅਰਥ ਉਸ ਦੇ ਅਲਵਾ ਥੋੜੀ ਆ ਠੀਕ ਹੈ ਜੀ ਨਾਨਕ ਵੱਡਾ ਆਖੀ ਆਪੇ ਆਪ ਇਹ ਹੁਣੇ ਪਰਮੇਸ਼ਰ ਵਾਸਤੇ ਵਰਤੋ ਆਪ ਨੂੰ ਆਪ ਜਾਣਦਾ ਵੱਡਾ ਕੋਈ ਵੀ ਕਹਾ ਸਕਦਾ ਵੱਡਾ ਪਰ ਉਹਨੂੰ ਤਾਂ ਆਪਣੀ ਕਵਿਤਾ ਪਤਾ ਹੈ ਠੀਕ ਹੈ ਜੀ ਪਰ ਵੱਡਾ ਉਹਨੂੰ ਕਹਿੰਦਾ ਇਦਾਜਾ ਜਿਹੜਾ ਸਭ ਕੁਝ ਆਪੇ ਜਾਣਦਾ ਆਪ ਠੀਕ ਹੈ ਜੀ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਦਾ ਨਾਨਕ ਜント ਵਿਚਾਰ ਆ ਤੇ ਹਰ ਕੋਈ ਠਾਗਰ ਵੀ ਉਹ ਹੀ ਹੈ ਸੇਵਕ ਵੀ ਉਹ ਹੀ ਹੈ ਬਾ ਬਾ ਗੋਬਿੰਦ ਆਪੇ ਕਰਕੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨਾ ਵਰ ਜਾਣਾ ਦਾਤਾ ਭੁਗਤਾ ਤੂੰ ਜੋ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਬਸ ਆਪੇ ਜੋ ਕਰਦਾ ਉਹ ਹੀ ਤੇ ਤੇਰੀ ਇੱਛਾ ਹੋਈ ਤੇਰੀ ਸੋਚ ਹੈ ਪਰ ਮੇਰੇ ਵੀ ਹੈ ਜੀ ਵਾਸਤੇ ਵੀ ਆ ਦੋ ਵਾਸਤੇ ਹੈ ਠੀਕ ਹੈ ਜੀ ਜੀਵ ਜੀਵ ਇਹਦਾ ਸੋਚਦਾ ਉੱਤੇ ਪਾਸੇ ਉੱਤੇ ਪਾਸੇ ਹੋਇਆ ਪਰ ਆਪਣਾ ਸੋਚਦਾ ਸਾਵੇ ਉਹੀ ਵਰਤੇ ਜੀ ਆਪੇ ਕਰਨੀ ਸੋਈ ਠੀਕ ਹੈ ਜੀ ਆਪਾਂ ਹੁਣ 14ਵੀਂ ਜੀ ਇਹਦੇ ਵਿੱਚ ਵੀ ਪੌੜੀ ਵਿੱਚ ਵੀ ਆਏਗਾ ਆਪੇ ਅੱਖਰ ਹਾਂ ਜੀ ਆਪੇ ਆਪੇ ਆਉਂਦੇ ਨੇ ਠੀਕ ਹੈ ਜੀ आप पे 68 तीर्थ करता आप करे स्नान आपे संजम वरते स्वामी आप जपाए नाम कर देखो ईज कुर्बान के बोल मूर्त हो के अपना दुख साफ कर ले तीर ਥੋ ਜਾਂਦੇ ਰਹੇ ਉਸ ਬੁੱਧੀ ਦੀ ਅਗਵਾਈ ਚੱਲਣਾ ਬੁੱਧੀ ਅਗਵਾਈ ਚੱਲ। ਅਗਲ ਤੀਰ ਸਿਗਲ ਅਫਦਲ ਤੀਰ ਰਾਤ ਤੀਰ ਉਸਰੀਆ। ਹਕ ਤੇ ਰਾਤ ਉਹਦਾ ਅਗਵਾਈ ਬੁੱਧੀ ਦੇ ਬੁੱਧੀ ਹੋਵੇ ਕੋਈ ਮਤ ਪਿੱਛਾ ਕਰੇ। ਬਸ ਤੀਰ ਥੋ ਠੀਕ ਹੈ ਜੀ। ਆਪੇ 68 ਤੀਰ ਆਪ ਕਰੇ ਇਸ਼ਨਾਨ। ਆਪੇ ਹੀ ਨਹਾਉਂ ਕਰਦੇ ਇਸ਼ਾਨਦ ਸਰੀਰ ਕਰਦਾ ਹੈ ਜਿਹੜਾ ਇਸ਼ਾਨਦ ਕਰਦਾ ਹੈ ਉਹ ਵੀ ਕਰਕੇ ਹੁੰਦਾ ਆਖੋ ਹੀ ਇਸ਼ਾਨਦ ਲੂਟ ਆਪੇ ਹੀ ਨਹਾਉਂ ਕਰਦਣਾ ਤੇ ਕੋਈ ਬਾੜੀ-ਬੂੜੀ ਨਹੀਂ ਕੋਈ ਸਰੋਵਰ ਹੁੰਦਾ ਜੋ ਸਮਝਦਾ ਜੋ ਸਮਝਦਾ ਜੋ ਵਿਚਾਰਦਾ ਜੋ ਇਸ਼ਨਾਨ ਹੋਈ ਜਾਂਦਾ ਸੁ ਆਪਣੇ ਆਪ ਹੀ ਸ਼ੁੱਧ ਹੋਈ ਜਾਂਦਾ ਹੈ ਕੋਈ ਬਾੜੀ ਨੂੰ ਵਿਚਾਰਦਾ ਹੈ ਗੁਰਮਤ ਨੂੰ ਵਿਚਾਰਦਾ ਹੈ ਜਿਉਂ-ਜਿਉਂ ਵਿਚਾਰਦਾ ਜਿਉਂ-ਜਿਉਂ ਵਿਚਾਰਦਾ ਤੇ ਆਪੇ ਹੀ ਸ਼ੁੱਧ ਆਪਰੇ ਆਪ ਨੂੰ ਸ਼ੁੱਧ ਹੋਈ ਜਾਂਦਾ ਹੋ ਜੇ ਬੋਲ ਤੰਦਰਤ ਪਿਆ ਇਹ ਬੰਗਾ ਹੀ ਬਦਲਦਾ ਰੋਜ਼ ਸੰਜਮ ਵਰਤੇ ਸੁਆਮੀ ਆਪ ਜਪਾਏ ਨਾਮ ਹਾਂ ਆਪ ਆਪਣੇ ਆਪੇ ਲਗੋ ਸੰਜਮ ਜਦੋਂ ਸੁਆਮੀ ਬਲ ਜੀ ਨੂੰ ਕਿਹਾ ਜੀ ਸੋਬੀ ਤਾਂ ਫਿਰ ਇੱਕ ਹੋ ਜਾਂਦਾ ਜਦੋਂ ਤਰਫ ਤਾਲ ਜੀ ਬਲ ਜਾਂਦਾ ਬੁੱਧੀ ਬੋਲਦੀ ਹੈ ਫਿਰ ਸੰਜਮ ਲੱਗਦਾ ਤੇ ਲੋਭ ਨਹੀਂ ਕਰਦਾ ਕੋਈ ਇਹਦਾ ਸੰਜਿਬੀ ਲੋਭ ਦੇ ਖਿਲਾਫ ਲੋਗ ਨੂੰ ਉਸਦੇ ਨਹੀਂ ਬਣਦਾ ਲੋੜ ਨੂੰ ਛਾਰ ਸੰਜਿਬ ਅਣਨੀ ਬਣਦੀ ਘੜਲੀ ਨਹੀਂ ਬਣਦੀ ਕੋਗ ਨਹੀਂ ਕਰਦਾ ਫਿਰ ਇਹ ਚਿੱਤ ਦੀ ਗੱਲ ਚੱਲਦੀ ਹੈ ਸਰੀ ਆਪੇ ਸਵਾਮੀ ਆਪ ਜਪਾਏ ਬਹੁਤ ਜਿਤਮਨ ਦੋ ਇਕੱਠੇ ਹੀ ਨੇ ਥਾਲੀ ਚ ਬਹੁਤ ਜਪਰਨਾ ਦਾ ਗੋਲ ਬੱਟ ਹੈ ਆਵਜ ਬਾਇਜਾ ਬੈਸਲ ਅਸਲ ਜੀ ਕਿਰਤਾਰ ਸਰਾ ਦੀ ਵਾਜੂ ਗੋਲ ਲੱਗਦੀ ਹੈ ਗੁਰੂਤਾ ਦੀ ਜੋ ਸਮਝ ਲੋ ਬਈ ਉਤੋਂ ਪੁੱਟੇ ਪਾਸੇ ਆ ਗਿਆ ਸਿੱਖਿਆਰੇ ਪਾਸੇ ਆ ਗਿਆ लाग लग ला गई आपा कहले तू आग लाग गया हूं कौन दे तेलू आग है लगी है, थी। है, थी। बोती कर ली है कि आप जो बहुत ऐसी बहुत ही गलली हैगी आपच पाए लोग शुरू हो की ता जफला दे देखो मेरा जो ऊपर ठीक है जी आप दयाल होए भव खंडन आप करे सब दान मान ਪਾਖੜਾ ਦਾ ਹੁੰਦਾ ਵੀ ਅੱਛਾ ਜੀ ਜੇ ਕਦੇ ਉਹਦੇ ਆਜ ਵਜੇ ਆਪ ਆਪ ਖੜੂ ਰੇਰਾਂ ਲੋਬ ਜੀ ਆਪ ਰੇਰ ਦਾ ਲੋਬ ਹੈ ਕਰੇ ਸ਼ਨਾਲ ਜਦੋਂ ਹੀ ਖੁਦ ਕਰਦਾ ਆਪੇ ਅੰਦਰ ਫੀਲਟ ਆਪ ਕਰੇ ਸ਼ਨਾਲ ਬਹੁਤ ਇੱਛਾ ਨੂੰ ਸਭ ਕੁਝ ਪੂਰ ਜਿਵੇਂ ਕਰਦਾ ਸਕਦਾ ਫਿਰ ਆਪ ਦਿਨ ਹੋ ਜਾਂਦਾ ਪਾਖੜਾ ਵੇ ਦੇ ਵੀ ਹੋਵੇ ਠੀਕ ਆ ਤੇ ਯਾਲ ਹੋ ਜਾਂਦੇ ਵੀ ਇਹ ਇਹ ਹੁਣ ਪਿੱਛੇ ਰੋਟੀ ਬੰਦਾ ਪਰ ਉਸਾ ਕਰ ਲੈਂਦਾ ਉਹ ਤੇ ਆ ਕਾ ਭਗੰਤ ਆਪ ਕਰੇ ਸਭ ਦਾਦ ਤੇ ਦੋਨੋਂ ਦੋਬੇ ਜਾਂਦੇ ਹੋ ਜਨਾ ਸੰਤੋਖਾ ਦਾ ਪੂਰਾ ਕਰ ਲੈਂਦਾ ਦੋ ਪਦਾਰਥ ਹੋਰੇ ਪਹਿਲਾਂ ਪੂਰੇ ਹੋ ਜਾਂਦੇ ਨੇ ਇਹ ਹੋ ਜਾਂਦੇ ਨੇ ਜੋ ਪੋਜਾਲ ਸਾਹਿਬ ਪੱਕਾ ਹੋਏ ਸਹੀ ਜਣਾ ਲੋ ਤੁਸੀਂ ਕਹਿਵੇ ਜੋਬਦਾਰ ਤੋਂ ਕਿ ਤੱਕੀ ਹੋ ਅੱਛਾ ਆਪ ਕਰੇ ਸਭ ਦਾਨ ਸਭ ਦਾਨ ਦੇ ਵਿੱਚ ਰੋ ਅੱਛਾ ਇਹ ਹੁਣ ਪਰਮੇਸ਼ਰ ਦੀ ਗੱਲ ਚੱਲ ਰਹੀ ਹੈ ਜੀ ਜੀਬ ਦੇ ਉੱਤੇ ਧਿਆਲ ਤਾਂ ਉਸਨੇ ਰੁੜੇ ਕਿ ਜੀਬ ਦੀ ਹਾਲਤ ਤੇ ਸੁਧਰੀ ਜੇ ਵੀ ਇੱਕ ਇਹ ਤਾਂ ਆ ਪ੍ਰੋਸੀਜਰ ਅਡਾਪਟ ਕਰਕੇ ਗੁਰਮੁਖੀ ਆਪ ਬੁਝਾਏ ਆਪ ਬੁਝਾ ਦੇ ਜਿਸ ਨੂੰ ਤਾਂ ਸਾਡੀ ਦਰਗਾਹ ਪਾਏ ਬੋਲ ਬੋਲ ਕੇ ਉਹ ਤੱਕ ਤੱਕ ਰਿਹਾ ਕਰੇ ਜੇ ਅੱਜ ਜੇ ਬੁੱਝ ਲਵੇ ਗੁਰੂ ਕੀ ਬੁੱਧੀ ਗੱਲ ਉਹ ਅਲੀਆਬਦੀ ਦੇਖ ਲਈ ਪਿੱਛੇ ਤਾਂ ਗੱਲ ਨਾਮ ਦੀ ਹੋਗੀ ਇੱਥੇ ਹੁਣ ਪਿੱਛੇ ਨੂੰ ਗੱਲ ਆ ਰਹੀ ਹੈ ਹੁਣ ਜਿਸ ਨੂੰ ਗੁਰਮੁਖੀ ਆਪ ਬੁਝਾਏ ਸੋ ਸਾਧ ਹੀ ਉਹ ਤਾਂ ਸਾਧ ਹੀ ਲਿਖਿਆ ਸਾਧ ਗੁਰਮੁਖੀ ਅੱਛਾ ਜੀ ਗੁਰਮੁਖੀ ਦੇ ਨਾਮ ਗੱਲ ਜਿਹੜਾ ਨਾਮ ਕੀ ਕਰਦਾ ਇਹ ਉਹਦਾ ਕੰਮ ਅੱਛਾ ਉਹਦਾ ਸਾਧ ਹੀ ਦਰਗਾਹ ਪਾਏ ਮਾਨ ਲਿਖਿਆ ਨੀ ਉਹ ਹੋ ਗਿਆ ਉਹ ਗਿਆ ਦੀ ਹੈ ਠੀਕ ਹੈ ਜੀ। ਉੱਗਿਆ ਤਾਂ ਨਹੀਂ ਤੇ ਕੇ ਉਹ ਨੂੰ ਬੜਵੀਂ ਹੈ। ਸੋਚ ਚੰਗੀ ਗੁਰਮੁਖੀ ਬੁੱਧੀ ਇੱਕ ਆ ਕਰਤਾ ਆਪ ਧਿਆਲ ਹੋਇਆ ਜੀ ਤੇ ਤੇ। ਆਪਣੇ ਤੇ ਕਈ ਵਾਰਾ ਕਰਦਾ ਹੈ ਜਾਈਂ ਆਪਸੀ। ਆਪਣੇ ਸਰਸ ਤੇਰਥ ਕਰਤਾ ਆਪ ਕਰੇ ਸ਼ਰਨ ਐਸੇ ਕਹਤਾ ਇਹਦੀ ਆਪ ਕਰਦਾ। ਇਹ ਕਿੱਧਰ ਕਿਸੀਂ ਦੱਸ ਸਕਦੇ ਆ ਅਗਲੀ ਗੱਲ ਆਪੇ ਸਜਦ ਵਰਤੇ ਸੁਆਮੀ ਆਪ ਜੇ ਪਾਇ ਨਾਮ ਆਸ ਤੇ ਜਲਾ ਹੋਏ ਜੇ ਆਪ ਦਿਆਲ ਹੋਏ ਤੋਖਨ ਆ ਫਿਰ ਇਹ ਤਾਂ ਜ਼ਬਾਨ ਵਿੱਚ ਤੇ ਦਵਾਸ ਵੀ ਚਲਦੀ ਠੀਕ ਹੈ ਜੀ ਆਪਣੇ ਵਰਗਾ ਬਣਾ ਸਕਦਾ ਹੋ ਗੁਰੂ ਉਹ ਗੱਲ ਦਾ ਸਭ ਪੌਖੜ ਨੇ ਆਪਣੀ ਬਰਦੀ ਦੱਸਲ ਸਤਿ ਸਬਾਹ ਜਲਦੀ ਹੈ ਉਹ ਤਾਂ ਠੀਕ ਹੈ ਪਰ ਇਹ ਲਾਈਨ ਤੋਂ ਤੋਂ ਬਾਅਦ ਚੱਲ ਰਹੀ ਹੈ ਨਾ ਹੁਣ ਭਾਈ ਕਾਹ ਲਿਆ ਗੁਰਮੁਖ ਪਰੰਗਿਆ ਗੁਰਮੁਖ ਵਲਕੇ ਕਲੂਗੀ ਜਿਸ ਨੂੰ ਗੁਰਮੁਖ ਆਪੁ ਜਾਏ ਸੋ ਸਦ ਹੀ ਦਰਗਹਿ ਪਾਏ ਮਾਨ ਉਹ ਜਿਸ ਦੇ ਪੌਖੜ ਆਪ ਕਰਤਾ ਮਿਹਰਬਾਨ ਹੋਇਆ ਗੁਰਮੁਖ ਬਣ ਗਿਆ ਠੀਕ ਹੈ ਜੀ ਹੁਣ ਦਰਗਹਿ ਮਾਨ ਮਿਲ ਰਿਹਾ ਜੀ ਕਦਾਂ ਦਾ ਮਾਰ ਬਿਲ ਰਹੀ ਹੈ ਅਜੇ ਉੱਗਿਆ ਤਾਂ ਨਹੀਂ ਹੈ ਅਜੇ ਸੱਚਖੰਡ ਫਿਰ ਪਹੁੰਚਿਆ ਤਾਂ ਨਹੀਂ ਅਜੇ ਉਹ ਜੇ ਲੱਭ ਗਿਆ ਹੁੰਦਾ ਪਰ ਬੋਲੂਗਾ ਉਹਦਾ ਚਾਰੇ ਬਦਾਰਤ ਮਿਲ ਗਏ ਦੋ ਬਜ਼ਾਰ ਖੋਦੇ ਠੀਕ ਹੈ ਤਾਂ ਦੀ ਗੱਲ ਹੋ ਰਹੀ ਹੈ ਜਿਸ ਨੂੰ ਗੁਰਮੁਖ ਆਪ ਜੈਸੋ ਸਾਡੀ ਦਰਗੇ ਪਾਏ ਮਾਨ ਠੀਕ ਹੈ ਫਿਰ ਜਿਹੜਾ ਹੋ ਗਿਆ ਉਹ ਤਾਂ ਸੱਚ ਕੰਡ ਪਹੁੰਚ ਗਿਆ। ਇਹ ਉਹ ਪਿੰਡ ਰੋਕਾ ਸੱਚਾ ਜਦੋਂ ਦੋਏ ਕੋਲ ਚੰਦਰੇ ਦੇ ਲੋਕ ਹੈ ਦੇ ਲੋਕ ਹੈ ਜਿਹੜੇ ਚੁੱਪ ਚਲੇ ਜਾਂਦੇ ਨੇ ਨਾ ਉਹ ਗੱਦੀ ਉਹ ਦੇ ਲੋਕ ਹੈ ਜਿਹੜੇ ਨੂੰ ਵਾਲੇ ਬੋਲਦੇ ਨੇ ਉਹ ਚੱਲਦਾ ਉਹਨਾਂ ਦਾ। ਹਾਕਮ ਵੀ ਹੈ। ਦੇ ਲੋਕਾਂ ਨੇ ਦੇਖਦੇ ਰਹੇ ਬੈਠੇ ਛੁੜਦੇ ਨੇ ਸਭ ਕੁਝ ਬੋਲ ਨਹੀਂ ਸਕਦੇ। ਅਜਾ ਬੋਗ ਗਏ ਹੈ। ਸੱਚਾ ਸਤਿਗੁਰੂ ਦੀ ਕੋਈ ਨਹੀਂ ਠੀਕ ਹੈ ਜਿਸ ਦੀ ਪੈਜ ਰੱਖਿਆ ਹਰ ਸੁਆਮੀ ਸੋ ਸੱਚਾ ਹਰ ਜਾਨ ਇਹ ਪੰਥ ਦੀ ਪਬਲਿਕ ਪੈਜ ਬੋਲਣ ਨਾ ਕਿਦੇ ਵਿਆਖਿਆ ਕਰਨਾ ਕਿਦੇ ਸਿਰ ਸੱਚਾ ਬੋਲ ਲਈਦਾ ਹੁਣ ਤੇ ਆਵ ਲੋਕਾਂ ਨੂੰ ਗਿਆਨ ਦਿੱਤਾ ਸੋ ਉਦੇ ਫਰੀਕ ਵੀ ਹੋਣਗੇ ਉਹਦੀ ਨਿੰਦਿਆ ਵੀ ਕਰਨਗੇ ਤੁਸੀਂ ਫੈਸਲਾ ਕਰ ਮੇਰੇ ਕੇ ਕਿਹੜਾ ਕਿੰਭਾ ਕਿਹੜਾ ਮਾੜਾ ਤੂੰ ਪੁੱਛੋ ਕਿ ਫੋਪ ਲਈ ਵਾਸਤੇ ਠੀਕ ਹੈ ਜੀ ਇਹ ਇੱਥੇ 14ਵੀਂ ਸਮਾਪਤੀ ਹੈ ਜੀ